ਸੋ ਲੋਕ ਦਾ ਪ੍ਰਭਾਰਨ ਕਰੂ ਪ੍ਰਭ ਇੱਕ ਹੈ ਦੂਸਰ ਨਹੀਂ ਕੋਈ ਨਾਮ ਕਿ ਕਿਸ ਬਾਰੇ ਹਾਰਨੇ ਜਲផល ਮਈਰ ਸੋ ਕਾਰਨ ਕਾਰਨ ਪ੍ਰਭ ਹੈ ਦੂਸਰ ਨਹੀਂ ਨ ਕੋਈ ਕਾਰਨ ਔਰ ਕਾਰਨ ਇੱਕ ਪ੍ਰਭ ਕੁ ਪ੍ਰਭ ਉਸੇ ਵੀ ਮੰਨਦੇ ਆਪਨੇ ਪਰਮੈਸ਼ਰ ਦਾ ਇੱਕ ਅਨੇਕ ਤੋਂ ਇੱਕ ਸੋਣੇ ਕਲਨ ਦਾ ਹੈ ਉਹ ਕਾਰਨ ਦੀ ਕਲ ਵਾਲਾ ਤਾਂ ਹੈ ਹੁਕਮ ਉਹਨੋਂ ਹੁਕਮ ਦਾ ਹਾਕਮਿਆ ਕਰਨ ਵਾਲਾ ਦਾ ਜਾਂਦਾ ਇਹ ਹਾਕਮ ਨੂੰ ਕਰਨ ਵਾਲਾ ਬਹੁਤ ਨਹੀਂ ਤਾਂ ਬਹੁਤ ਹਾਕਮ ਪ੍ਰਭੂ ਅਸੱਚਾਣ ਦਾ ਸਤਿਗੁਰੂ प्रभु पर भी जानाहार है जानो नाम सभी पर भी प्रभु पर भी सारी सृष्टि का जो रहता ध्यान प्रभु पर भी तो भ्रम ही पर्वी है बाहर से इतना कहूं कि थोड़े हर कलनु इसी देही ना बच्चे याद रखा है एक है दूसर नाही कोई 4 ਦਿਸ ਬਰੇ ਹਾਰਨੇ ਜਲਥਲ ਵਹੀ ਹਲੋ ਕਾਰਨ ਕਾਡ ਪ੍ਰਭਾ ਵੇਚਾ ਕਿ ਕੀਰ ਪ੍ਰਭਾ ਉਹ ਕਾਰਨ ਕਾਡ ਇਕਸ ਹੈ ਤਾਂ ਇੱਕ ਅਸਤ ਇੱਕ ਨੂੰ ਵਨ ਦੀ ਸੰਸਵਿਚ ਨਹੀਂ ਅਜੇ ਇਹਨੂੰ ਵਨ ਦੀ ਸੰਸਵਿਚ ਇਕ ਲੈ ਗਈ ਉਹ ਉਹ ਕਰਦਾ ਸਤਖੰਦ ਦੇ ਵਿੱਚ ਵੀ ਇਹ ਨੇ ਇੱਕ ਨੇ ਘੜਤੀ ਪਿੱਛੇ ਦਾ ਬਹਾਰ ਨਹੀਂ ਕਈ ਕੋੜ ਤੱਕ ਕੋਟਾ ਦੇ ਵਿੱਚ ਚੱਲਦਾ ਆ ਪੀਜੀਐਸ ਵੀ ਜੀਐਸ ਰਚਨਾ ਦਾ ਵੀ ਚ ਕਰੋੜਾਂ ਦੇ ਤੇਰੀ ਵਿਕ ਕੀਆ ਕਰੋੜਾਂ ਚਲੇ ਜੀਵਨ ਸਾਰੇ ਦਾ ਕਾਰਨ ਹੈ ਚਲੋ ਕੱਟਣਾ ਸਹੀ ਕਾਰਨ ਦਾ ਸਾਰੇ ਨੇ ਵਜਾ ਤਾਂ ਸਾਰੇ ਨੇ ਹਸਪਤਾਲ ਭਰਉਣ ਦੇ ਖਰੀਦ ਦੀ ਕਾਰਨ ਹੁੰਦਾ ਮਰੀਜ਼ ਸਾਹਿਬ ਨੂੰ ਕਿਤੇ ਨਾ ਕੰਨੀ ਹੋਣ। ਮਰੀਜ ਧੀ ਲੋੜ ਹਸਪਤਾਲ ਦੀ ਡਾਕਟਰ ਦੀ ਲੋੜ ਨਹੀਂ ਹੈ। ਡਾਕਟਰ ਦੀ ਲੋੜ ਨਹੀਂ ਹੈ। ਡਾਕਟਰ ਦੀ ਲੋੜ ਰੋਟੀ ਹੈ। ਗਰੀਜੇ ਲੋੜ ਹਸਪਤਾਲ ਦਾ ਡਾਕਟਰ ਦੋੜੇ। ਉਹ ਲੱਗ ਗੱਲਾਂ ਡਾਕਟਰ ਵੀ ਲੋੜ ਨੂੰ ਮੰਨ ਲਵੇ। ਵੀ ਬਈ ਜੇ ਹੁਣ ਜਮਾ ਪੈਸੇ ਵਾਲਾ ਹੋਊਗਾ ਤੇ ਡਾਕਟਰ ਦੀ ਲੋੜ ਨਹੀਂ। ਡਾਕਟਰ ਦਾ ਪਰਪਕਾਰ। ਜੇ ਪਰਪਕਾਰ ਨੂੰ ਲੋੜ ਮੰਨ ਲੀਏ। ਕੋਈ। ਜੇ ਪਰਮੈਸ਼ਰ ਦੀ ਕੋਈ ਲੋੜ ਹੈ ਉਹਦਾ ਪਰਪਕਾਰ। ਡਾਕਟਰ। ਸੱਚ ਤਾਂ ਅਗੂ ਜਿਦੇ ਵੀ ਪਰ ਪਰਪਕਾਰ ਹੀ ਹੈ। ਇੱਕ ਪਰਮੈਸ਼ਰ ਉਸ ਲੱਗਦਾ। ਫਿਰ ਉਹਦੀ ਬੋਲੇ ਕਹਿੰਦੇ ਇਸ ਤਾਂ ਜਿਹੜਾ گاਵਣ ਤੁਹਾਨੂੰ ਇਸਰ ਮਰਦਾ ਦੇ ਜਿਹਦਾ ਜਨਮ ਲਿਆ ਹੋਇਆ ਉਹ ਕਹਾਰੇ ਹੈ ਕੋਈ ਸਰ ਵਰਮਾ ਦੇ ਨਹੀਂ ਦੇਦਾ ਜੀ ਇਹ ਸੋਧ ਬਣਦੇ ਹੈਗਾ ਤਾਂ ਹੀ ਗਾਉਂਦਾ ਗੋੜਾ ਇਸਰ ਦੇਦਾ ਸਵਾਲ ਉਹ ਪਰਮੇਸ਼ਵਰ ਨੂੰ ਬੋਲਦਾ परमेश्वर मतलब परमेश्वर इस सारे जाते ज्यादा ब्रह्म तो सब hmm. सब ब्रह्म है सब ब्रह्म है ईश्वर ब्रह्म देवी ब्रह्म रूप है सारे ਦੇ ब्रह्म ब्रह्म का रूप है चल ब्रह्म पूर्ण ब्रह्म हो गया फिर परमेश्वर तो परमेश्वर परम ही ज्यादा है कोई जब तक इशारा उठ तक करता मत पे है ज्यादा आ गया तो तो देव का ही है ना मत पे दो जरा जब भी शुरू हो गया मत नहीं रहने है तो ये है हाथ खत्म होए थे बाद ही पर मतलब लघु वो परम पुरुष भी या लघु ਪਰਮਾਤਮਾ ਦੀ ਤਾਂ ਲੱਗੂਗਾ ਪਰਮ ਜੋਤ ਵੀ ਚੱਲ ਲੱਗੂਗਾ ਇਹਦੇ ਨਾਲ ਸਪੂਰਨ ਪਰਮ ਉਹ ਪਰਮ ਲੱਗੂਗਾ ਪਹਿਲਾ ਕਲ ਲੱਗੂਗਾ ਜੋਤ ਜੋ ਦੀਆ ਪਗਲ ਕਰਦੇ ਇਹਦਾ ਜਿਹੜਾ ਹੈ ਸ਼ਲੋਕ ਇਹਦਾ ਅਰਥ ਕਿਵੇਂ ਲੱਭਾਂਗੇ ਕਿਵੇਂ ਸਾਨੂੰ ਪਤਾ ਲੱਗੇ ਵੀ ਕਾਰਨ ਕੌਣ ਹੈ ਪਰਬ ਤਾਂ ਪਰਮੇਸ਼ਰ ਨੂੰ ਕਹਿੰਦਾ ਗੁਰਬਾਨ ਜੀ ਉਹ ਵੀ ਆ ਜਾਂਦੇ ਕਾਰਨ ਕਾਰਨ ਪ੍ਰਭ ਇੱਕ ਹੈ ਦੇਖ ਇਹ ਕਦੀ ਇਹ ਠੀਕ ਹਾਂ ਇੱਕਾ ਇੱਕ ਵਰਤ ਜੇ ਵੱਲੋਂ ਹੁੰਦਾ ਤਾਂ ਇਹਦੇ ਅਨੁਸਾਰ ਹੀ ਫਕਰ ਉਪਰ ਹੋਮ ਉਸੇ ਇੱਕ ਸੇ ਇੱਕ ਦੇ ਨਾਲ ਸੇ ਲੱਗ ਜਾਂਦਾ ਸੇ ਘਟਿਆ ਤਾਂ ਇੱਕ ਲੱਗਦਾ ਕੱਲਾ ਵਿਜੇ ਆਇਆ ਇੱਕ ਸੇਨਾ ਆਇਆ ਹੈ ਉਹ ਇੱਕ ਵੱਡੂ ਵੱਡ ਨਾਲੇ ਪ੍ਰਾਪਰਟੀਆਂ ਸਾਰਿਆਂ ਦੀ ਪ੍ਰਾਪਰਟੀ ਉਹ ਆਂਦੇ ਆ ਉਹ ਵੰਡਿਆ ਲਫ਼ਜ਼ਾ ਨਾ ਵੰਡਣ ਕਾਰਨ ਨਹੀਂ ਹੈ ਕਲ ਬਹੁਤ ਸਾਰੇ ਦੇ ਜਬਰੀ ਜਮਾਨ ਤੇ ਵਿਖੇ ਸਮਸਤ ਇੱਕ ਜੋ ਕਾ ਅਬੂ ਇਹ ਸਾਹਿਬ ਜੀ ਜਿਹੜੀ ਸਾਰੀ ਜੋਤ ਏਕ ਹੈ ਸੰਸਾਰ ਦੀ ਸਾਰੀਓ ਕਾਰਨ ਜੋਤ ਕੋਈ ਬਾੜ ਹੈ ਨਾ ਘਾਟ ਹੈ ਨਾ ਘਾਟ ਬਾੜ ਬਹੁਤ ਹੈ ਇੱਕ ਲਾਈਨ ਗੱਲ ਜਿਹੜੀ ਕਲੀਅਰ ਕਰ ਦਿਆ ਵੀ ਪੋਜੀਸ਼ਨ ਅਸਲ ਹੈ ਕੀ ਫਿਰ ਬੱਦ ਘੱਟ ਅਸੀਂ ਪੌਂਡੀਆਂ ਦੇ ਖੜੇ ਮੰਨਦੇ ਹਾਂ ਬੱਦ ਘੱਟ ਗਿਆਨ ਮੰਨਦੇ ਆ ਸਭ ਤੋਂ ਜ਼ਿਆਦਾ ਹੈ ਜਿਹੜੇ है कि ਹੈ ਉਹਦੇ ਕੋਲ ਕੋਈ ਭਾਰੀ ਚੀਜ਼ ਹੋਊਗੀ ਆ ਕਿ ਜੇ ਭਾਰ ਹੋਊਗਾ ਕੀਆਊਗਾ ਉਹ ਹੈ ਜਾਂ ਉਹ ਆਊਗਾ ਹਾਂਜੀ ਅਸਰ ਦੇ ਵਿੱਚ ਸਾਰੇ ਸੱਚ ਖਾਂਦੇ ਵਸਿੰਦੇ ਜਦ ਵੀ ਹੁੰਦੀ ਜੇ ਬਾਪ ਸਾਧ ਦਾ ਸੁਖ ਸਾਫ ਤੇ ਵਿੱਚ ਹੀ ਆ ਬਾਪ ਸਾਧ ਰਹੇ ਹੋ ਨਹੀਂ ਕੋਈ ਅਸਲ ਬਾਪ ਸਾਧ ਰਹਿੰਦਾ ਕੀ ਬਾਪ ਸਾਧ ਰਹੇ ਨਹੀਂ ਫਰਜ਼ੀ ਹੈ ਬਾਪ ਸਾਧ ਦਾ ਬਾਪ ਸਾਧ ਕਿੱਥੇ ਕਿ ਹੁੰਦਾ ਕਿੱਥੇ ਬਾਪ ਸਾਧ ਤਾਂ ਤੱਕ ਸੁਪਰਡ ਸੁਪਨਾ ਦੇ ਲੰਬੋਂ ਸੱਜੇ ਖਿਆਲ ਹੈ ਕੋਈ ਖਿਆਲ ਤਾਂ ਨਕੋਂ ਸੱਜੇ ਸੁਪਨੇ ਆਪਿਆ ਬੈਠੇ ਸਾਰੇ ਸੱਜਣ ਤੇ ਕੁਝ ਸੁਪਨਾ ਦੇਖਦੇ ਨੇ ਸੁੱਤੇ ਨੇ ਕੋ ਜਾਗਦੇ ਨਹੀਂ ਤਸ ਵੱਧ ਘਟ ਪਾਣਾ 41 ਸੰਸਣ ਸੋਇਆ ਸੁਪਨੇ ਆਪਿਆ ਕਿ ਪਿਆ ਉੱਥੇ ਹੀ ਗੱਲ ਪਸੰਹ ਸਾਰੇ ਇੱਥੇ ਖੜ੍ਹੇ ਬੈਠੇ ਨੇ ਭੱਪ ਸਾਹਿਬ ਇੱਥੇ ਕਿਵੇਂ ਹੋਊ ਜੂ ਜਾਵੇ ਸੁਪਨਾ ਦੇਖਦਾ ਆ ਭੱਪ ਸਾਹਿਬ ਕਹਿੰਦਾ ਜਾਗਦਾ ਫਿਰ ਸੱਚ ਖੜਦਾ ਤੇ ਸੁਪਨਾ ਘਟੂ ਹੁੰਦਾ ਹੋ ਗਿਆ ਨਾ ਸੁਪਨਾ ਸੁਪਨਾ ਕਦ ਹੈ ਬੈਠਾ ਦਿੱਤੇ ਬੈਠਾ ਉੱਥੇ ਬੈਠਾ ਜੇ ਤੋਇ ਪਿਆ ਸੀ ਆ ਬੈਠਾ ਸੀ ਜਿੱਦੇ ਉਂ ਆ ਕੇ ਸੁਣਨਾ ਆਇਆ ਤਾਂ ਬੈਠਾ ਉੱਥੇ ਇਕ ਨਹੀਂ। ਜਦ ਖੁਦ ਉਥੇ ਬੈਠਾ। ਬੈਠਾ ਹੈ ਉਸੇ ਯਾ ਕੁਰਸੀ ਦੇ ਉੱਤੇ। ਫੇਰ ਜਿਹੜੇ ਪਸੰਦਾਂ ਕੋਈ ਆਇਆ ਕਰਦਾ। ਪਾਗੜਾ ਹੁੰਦਾ ਹੀ ਨਹੀਂ ਕੋਈ। ਵਿਚਿੱਤਾ ਵੀ ਨਹੀਂ ਚੀਦ ਅੰਦੀ। ਵੇਖੋ। ਸੁਖਸਾਧ ਦੇ ਵਿੱਚ ਪਾਪਸਾ ਕਰ ਚੁੱਕੀ ਹੋਈ। ਔਰ ਨਹੀਂ ਭੱਭ ਸਾਧਰ ਨਾ ਸੁਖ ਸਾਧਰ ਸਾਡਾ ਹਿਰਦਾ ਹੀ ਭੱਭ ਸਾਧਰ ਹੈ ਨੇ ਮਨ ਮੁਖਦਾ ਹਿਰਦਾ ਸਿ ਭੱਭ ਸਾਧਰ ਗੁਰੂ ਭੱਧਾ ਸੁਖ ਸਾਧਰ ਉਹ ਉਹ ਨਹੀਂ ਬਦਲਣਾ ਇਤਾਂ ਨੂੰ ਤਾਂ ਫਿਰ ਉਹ ਕੇ ਇੱਥੇ ਹੀ ਸੁਖ ਸਾਧਰ ਕੇ ਬਹਿ ਜਾਏ ਵੀ ਹੈ ਭੱਭ ਸਾਧਰ ਉਹ ਸੁਸੰਗ ਕਰੇ ਸੀ ਉਹਦਾ ਓਏ ਉਹਦਾ ਸੁਸੰਗ ਕਰਾ ਉਹਦਾ ਭਵਸਾ ਕਰਾ ਉਹਦਾ ਭਵਸਾ ਕਰਾ ਉਹਦਾ ਸੁਸੰਗ ਕਰਾ ਸਭਾ ਜਨ ਉਹਦੇ ਮੱਥੇ ਭਵਸਾ ਕਰਾ ਜਿਹੜਾ ਨਾਨਕ ਬੋਲਦਾ ਕਿਤੇ ਕਿਤੇ ਜਾ ਕੇ ਹੋਰ ਤਰ੍ਹਾਂ ਛੱਡੂ ਰਹਿਤਾ ਰਹਿੰਦਾ ਇਥੇ ਹੀ ਸਭ ਕੁਝ ਸਰਬਵਿਆਪਕੀ ਓਇਆ ਸਰਬਵਿਆਪਕੀ ਇੱਥੇ ਕਿਉਂ ਨਹੀਂ ਵਾਦ ਹੋ ਜਾਏ ਜੇ ਜਹਾਨ ਹੋਏ ਫਿਰ ਉਹ ਆ ਬਾਹੂਰ ਦੇ ਪਾਟੋਲੇ ਦੇ ਭਰਪਲਾਈ ਹੋ ਜੂ ਸਾਡਾ ਵੀ ਪਾਟੋਲੇ ਦੇ ਬਿਲਕੁਲ ਸਾਹ ਕਹਣਾ ਚਾਹੀਏ ਹਾਂ ਮੁッコ ਸਾਹ ਕਹਣਾ ਇਹ ਤਾਂ ਆਪਣਾ ਮਾਨਸਿਕ ਅਵਸਥਾ ਦੀ ਗੱਲ ਆ ਆਪਾਂ ਸਾਂ ਕਰਾਂ ਸੁਸਾ ਦੇਣ ਸੁਣਦੇ ਰਸੇਵਰ ਅਲਦੀ ਜਦ ਸਾਦ ਤੁੰਤੂ ਕਰਦਾ ਤੂੰ ਪਿਆ ਤੂੰ ਤੋਦ ਕਰਦਾ ਤੁੰਬਿਆ ਤੂੰ ਤੋਦ ਗੱਲ ਲੱਗਿਆ ਸੁਬਨਿਚ ਸੁਖਾਂ ਚ ਗਮਰਾਗਾ ਤੂੰ ਤੋਵੇਂ ਨੇ ਕਹੇ ਤਾਂ ਵੀ ਤੂੰ ਤੋ ਗਲੀ ਜਾ ਮੈਂ ਨਾ ਨਾ ਕਰੀ ਮੈਂ ਬੋਲਣੀ ਉਹ ਛੱਡ ਤੂੰ ਤੋ ਜਾ ਕਦ ਤੁਦ ਤੁਦ ਤੂੰ ਪਿਆ ਮਜਬਹ ਰਹਾ ਨਾ ਓ ਓ ਮੈਂ ਮੈਂ ਹੂੰ ਐ ਮੈਂ ਹਾਂ ਇਹ ਕੋ ਲੈ ਗਿਆ ਦੁਨੀਆਂ ਨੂੰ ਦੇਖਦਾ ਆਪ ਨੂੰ ਦੇਖਦਾ ਹੀ ਨਹੀਂ ਆਪਣੇ ਸਰੀਰ ਨੂੰ ਦੇਖਦਾ ਹੀ ਨਹੀਂ ਆਪਣੇ ਸਰੀਰ ਤੇ ਬਿਨਾ ਸਰਪਤ ਨੂੰ ਦੇਖਦਾ ਦੰਦੇ ਨੂੰ ਦੇਖਦਾ ਆ ਗੱਲ ਆ ਜੇ ਆਪਾਂ ਸਰੀਰ ਛੱਡ ਕੇ ਦੇਖਦਾ ਫਿਰ ਮੈਂ ਨਹੀਂ ਹੁੰਦੀ ਮੈਂ ਜਿਆਦਾ ਜਿਆਦਾ ਸਰੀਰ ਸਨੇ ਦੇਖ ਰਿਹਾ ਨੂੰ ਉਹਦੇ ਵਸਣ ਕਾ ਕਹਦੇ ਨੇ ਇਸ ਤਰ੍ਹਾਂ ਮੇਰੋ ਹਰ ਤੋਂ ਮੈਂ ਜੋਤਰੀ ਹੁ ਆ ਰਹ ਹਰ ਵਨੋਂ ਸਰੀਰ ਆਪਣਾ ਨਹੀਂ ਜੀਦਾ ਤਾਂ ਦੇਖਾਂ ਦੁਹੇਦਲ ਜਾਈਗਾ ਸੋ ਹੋ ਗਿਆ ਸੁਪਨਾ ਖਤਮ ਹੋ ਗਿਆ ਸਾਰ ਦੋ ਝੂਠਾ ਸੁਪਨਾ ਮੰਨ ਲਿਓ ਜੋ ਦੀਨ ਝੂਠ ਹੈ ਜੋ ਦੇਖਣਾ ਉਹ ਸੱਚ ਹੈ ਸੱਚ ਤਾਂ ਦੇਖਣਾ ਆਪਨ ਸੱਚ ਤਾਂ ਦਰਸ਼ਨ ਕਰਦੇ ਸੱਚ ਨੂੰ ਕਿਹਾ ਸੱਚਾ ਮਰਜ਼ੀ ਦੀ ਸੱਚ ਹੈ ਜਿਹਦੀ ਸਹਾਇਆ ਦਿਓ ਸਹਾਇਆ ਤੁਹਾਨੂੰ ਸੱਚ ਹੈ ਸੱਚ ਤਾਂ ਸਾਰੇ ਦੇ ਵਿੱਚ ਹੀ ਹੈ ਅਣਜਾਣੋਂ ਜੋ ਤਰ੍ਹਾਂ ਪੁੱਛੀ ਜਾਂਦੀ ਜਾਣਾ ਜੋ ਸੱਚ ਸਾਰਿਆਂ ਦੇ ਵਿੱਚ ਹੀ ਜਿੰਨਾ ਸਿੱਖ ਸਕਦੇ ਆ ਵਿਚਾਰਵਾਣ ਦੇ ਉੱਚੀ ਨੀਚੀ ਕਿਹਾ ਕਹਿਣੇ ਆ ਜੇ ਤਾਂ ਕੋਈ ਹੋਰ ਤਾਂ ਆਣਾ ਲੋ ਸਾਰ ਧੂਕ साडे कहन दे विचियां लोकां ने कहो मतलब कोई सवाल थो समझया तो बनती नहीं कह नहीं सकदे और कहना अपराध भी है कहना भी है झूठ बोलना अपराध होता है झूठ है आपा कहते झूठ बोलना पाप है आईये देखो चारवा ना है ही नहीं चार बार कहना भूलना पाप है असली चार दरवाजे बनाई बैठे तो पता लगूंगा वे उठे ਬਹੁਤ ਹੀ ਰਹਾ ਸੀ ਐਵੇਂ ਇਹ ਜਾਮਲਾ ਕੀ ਹੋ ਰਿਹਾ ਸੀ ਕਿਉਂ ਹੋ ਰਿਹਾ ਸੀ ਗੁਰੂ ਘਰ ਦੇ ਵਿੱਚ ਉਪਦੇਸ਼ ਹੋ ਰਹੇ ਸੀ ਆ ਗੁਰਬਾਣੀ ਦਾ ਉਹੀ ਉਪਦੇਸ਼ ਆ ਆਪਣਾ ਆਪਾ ਤਾਂ ਬਹੁਤ ਤੋਂ ਲੱਗੇ ਤਾਂ ਉਹੀ ਗੱਲ ਹੈ ਉਸੇ ਗੱਲ ਨੂੰ ਬੁਝਾਰ ਰਹੇ ਹਨ ਕਾਰਨ ਕਾਰਨ ਪ੍ਰਵੇਸ਼ ਹੈ ਹੁਣ ਜੇ ਕਾਰਨ ਕਾਰਨ ਪ੍ਰਵੇਸ਼ ਕਹੇ ਦੱਸੋ ਕਿੱਥੋਂ ਆ ਗਏ ਚਾਰ ਰੰਗ ਉਹਦੇ ਚ ਹੈ ਸਭਾਂ ਜੋਤ ਚੋਤਾ ਸੋਈ ਸਾਰਿਆਂ ਦੀ ਉਹੀ ਜੋਤ ਹੈ ਉਹੀ ਪੰਜ ਤਤਨਾ ਹੋਈ ਜੋਤ ਹੈ ਉਹ ਕੁਝ ਹੋਰ ਕਾਰਨ ਸੇ ਚਲੋ ਆਪਾਂ ਟੋਪਰ ਦਿੱਤੇ ਨਾ ਇੱਥੇ ਕੀ ਨਹੀਂ ਇਹ ਜੇ ਕਾਰਨ ਕਾਰਨ ਪ੍ਰਭਾ ਇੱਕ ਹੈ ਕੌਣ ਕਾਰਨ ਕਾਰਨ ਹੈ ਕਾਰਨ ਔਰ ਕਾਰਨ ਇੱਕੋ ਹੀ ਹੈ ਕੌਣ ਜਿਹੜਾ ਜਾਗਿਆ ਨਹੀਂ ਨਾ ਜੇ ਸੁਤਾ ਹੈ ਸੁਪਨਾ ਦੇਖਦਾ ਉਹ ਕੌਣ ਕਾਰਨ ਤਾਂ ਹੋ ਗਿਆ ਕਾਰਨ ਕਿਵੇਂ ਹੈ ਕਾਰਨ ਤਾਂ ਹੋ ਵੀ ਉਹਨੂੰ ਪੜਾਉਣਾ ਜਨਮ ਲੈਣ ਦਾ ਸ੍ਰਿਸ਼ਟੀ ਦਾ ਕਾਰਨ ਬਣ ਗਿਆ ਉਹਨਾਂ ਨੂੰ ਜਗਾਉਣਾ ਉਹਨੂੰ ਸੁੱਤੇ ਨੂੰ ਕੋਈ ਜਾ ਕੇ ਕੋਈ ਜਾਕੇ ਕਾਰਨ ਨੂੰ ਕਰਮ ਕਾਰਨ ਕਾਹਨ ਕਾਹਨ ਪੈਦਾ ਕਰਦਾ ਹੈ ਇਹ ਕਰਨ ਬਹਿਣਾ ਕਿ ਕਾਰਨ ਕਾਰਨ ਪ੍ਰਭ ਇੱਕ ਹਾਂ ਕਾਰਨ ਕਾਹਨ ਪ੍ਰਭ ਇੱਕ ਹੈ ਕਾਰਨ ਦੇ ਕਾਰਨ ਵਾਲਾ ਕਾਰਨ ਦੀ وجہ ਕਾਰਨ ਦੀ وجہ ਇਸ ਕਹ ਪ੍ਰਭ ਕਾਹਨ ਪੈਦਾ ਕਰਨ ਵਾਲਾ ਕਾਹਨ ਉਹ ਇਹ ਸੁੱਤਾ ਪਿਆ ਸੀ ਉਹ ਜਿਹਨੂੰ ਜ਼ਖਮ ਹੋਇਆ ਫਿਰ ਕਾਹਨ ਵਾਲਾ ਬਣ ਕਿ ਉਸੇ ਨਾਲ ਕੁਝ ਕਰਨਾ ਹੈ ਜਿਹੜਾ ਬੁਖਤ ਹੈ ਸਤਸਾਰ ਦੇ ਚੱਕੇ ਤੋਂ ਉਹ ਤੇ ਹੀ ਘਰੋਣਾ ਨੇ ਜਿਹਨਾਂ ਜਨਮ ਲੈਣਾ ਮਾਰਨ ਵਾਲਾ ਵੀ ਉਹੀ ਹੈ ਪੈਦਾ ਕਰਨ ਵਾਲਾ ਵੀ ਉਹੀ ਹੈ ਔਰ ਪਰਵਿਸ਼ ਕਰਨ ਵਾਲਾ ਵੀ ਜਿਹਨਾਂ ਜਨਮ ਲੈ ਜੀਵ ਜੀਵ ਪੈਦਾ ਕਰਦੇ ਨੇ ਜੀਵ ਜੀਵ ਪਾਲਦੇ ਨੇ ਜੀਵਾਂ ਨੂੰ ਜੀਵੀ ਜਨਮ ਦਿੰਦੇ ਨੇ ਕਿਤੇ ਕੱਬੀਆ ਬੇ ਕਰਦੇ ਨੇ ਕਰਮਾਂ ਵਾਲੇ ਨੇ ਛੱਡੋ ਤੁਸੀਂ ਉਹ ਤਾਂ ਗੁੱਤ ਹੈ ਹਾਂ ਜਿਹਨੇ ਸਿ ਬੜਾਇਆ ਮਾਇਆ ਮਾਇਆ ਰੋਹ ਉਹ ਗੱਲ ਉਹ ਅਲੱਗ ਹੈ ਉਹਦੀ ਗੱਲ ਨਹੀਂ ਚੱਲਦੀ ਉਹ ਪ੍ਰਭੂ ਉਹ ਕੀਤਾ ਉਹਦਾ ਵੀ ਜੀਵ ਹੈ ਕਾਰਨ ਸ੍ਰੀ ਚਾਹੀਦਾ ਸਭ ਕੁਝ ਚਾਹੀਦਾ ਉਹਦਾ ਵੀ ਕਾਰਨ ਤਾਂ ਉਹਦਾ ਵੀ ਜੀਵ ਹੈ ਨਾ ਉਹਦਾ ਵੀ ਕਾਰਨ ਪੈਦਾ ਇਹਦੇ ਹੋਇਆ ਜਿਹੜੇ ਜਗਤ ਦੇ ਉਹ ਕਰ ਉਹਨਾਂ ਦਾ ਜਗਾ ਰਹੇ ਜੀ ਅਸਲ ਜੋ ਪਰਵਕਾਰ ਹੈ ਹਾਂ ਉਹਨਾਂ ਦਾ ਪਰਵਕਾਰ ਤਾਂ ਇਹ ਆਦਿਨੂ ਜਨ ਪਰਵਕਾਰੀ ਆਏ ਜਨ ਪਰਵਕਾਰੀ ਆਏ ਦਾ ਮਤਲਬ ਹੈ ਕਿ ਸਾਜ ਖਾਨ ਵਾਲੇ ਸਾਰੇ ਪਰਵਕਾਰੀ ਨੇ ਇਹ ਜਨ ਪਰਵਕਾਰੀ ਹੈ ਇੱਥੇ ਕਰਮ ਕਰਾਉਣ ਨਾਲ ਕੋਈ ਕਰਨ ਕਰਾਉਣਾ ਹਾਲਤ ਹੋਮ ਨੇ ਤੇ ਚਲੋ ਕਰ ਆਪ ਉਥੇ ਉਥੇ ਜਦ ਸਰੀਰ ਹੈ ਜਦ ਹੀ ਗੱਲ ਹੈ ਸਰੀਰ ਤੋਂ ਪਹਿਲਾਂ ਦੀ ਗੱਲ ਹੈ ਇਹ ਤੇ ਸ੍ਰਿਸ਼ਟੀ ਰਚਣ ਤੋਂ ਪਹਿਲਾਂ ਦੀ ਗੱਲ ਕਰਦੇ ਹਾਂ ਉਥੇ ਸਰੀਰ ਜਦ ਹੋਇਆ ਰਚਿਆ ਹੋਇਆ ਉਹ ਕਰਨ ਵਾਲਾ ਵੀ ਆਪ ਹੈ ਇਹ ਖੱਤ ਕਰਨ ਵਾਲਾ ਕਰਾਉਣ ਵਾਲਾ ਜਿਹਨਾਂ ਆਪ ਕਹਿੰਦੇ ਚੇਤਨ ਕਰਾਉਣ ਵਾਲਾ ਸਰੀਰ ਤੇ ਕਰ ਨਾਲ ਸਰੀਰ ਨਾਲ ਸਰੀਰ ਨੂੰ ਰਚ ਕੇ ਪਾਉਣ ਨੂੰ ਠੀਕ ਆਦਰ ਦਾ ਉਹ ਜਿਦੀ ਦੀ ਫੋਰਸ ਇਹ ਇਹਦੀ ਆਪਣੀ ਫੋਰਸ ਹੈ ਸਰੀਰ ਦੀ ਤਾਕਤ ਆਪਣੀ ਹੈ ਚੇਤਨ ਦੀ ਤਾਕਤ ਆਪਣੀ ਅਲੱਗ-ਅਲੱਗ ਨੇ ਸਰੀਰ ਘਰ ਕੇ ਵਿੱਚ ਜਵਾਨ ਆਦਮੀ ਵੀ ਬਿਲਕੁਲ ਉਠ ਨਹੀਂ ਹੁੰਦਾ ਜਦੋਂ ਮਾਰ ਹੋ ਜੂ ਚਾਰ ਦਿਨ ਚਾਰ ਦਿਨ ਵਿੱਚ ਦੁੱਧਰ ਪੀਲਾ ਦਾ ਫੇਟੀ ਉਹ ਤਾਂ ਹੋ ਜਾਂਦੀ ਸਰੀਰ ਦੀ ਤਾਕਤ ਨਾਲ ਕਰ ਉਹ ਦਵਾਈ ਉਹਦਾ ਕਰਦਾ ਉਹ ਨਹੀਂ ਕਰਦਾ ਹੁੰਦਾ ਛਾਣੇ ਆਦਮੀ ਹੈ ਸਰੀ ਜਾਂਦੀ ਰਤੀ ਬੁੱਧਵਾਲ ਥੋੜੀ ਕਰ ਜੂਗਾ ਦਾ ਬੁੱਧਵਾਲ ਸਭੋਂ ਤਕੜਾ ਹੁੰਦਾ ਹੈ ਜੇ ਗਿਆਨवान ਹੋਵੇ ਤਾਂ ਇਹ ਗੱਲਾਂ ਕੋਈ ਬੋਲ ਦੇ ਕਦੇ ਨਾ ਅਜੀ ਦਾ ਬੇਨ ਵੀ ਉਹਦਾ ਇਨਸਾਈਟ ਕੋਈ ਥੋੜਾ ਜਿਹਾ ਬੀਜੇ ਗਿਆਨ ਹੋ ਨਾ ਔਰ ਫਿਕਰ ਕਰੀ ਆਵੇ ਬੁਢੇ ਹੋ ਗਏ ਹੋਵੇ ਉਹ ਉਹਦੀ ਹੋਏਗੀ ਬੁੱਧੀ ਹੁੰਦੀ ਹੈ ਗਿਆਨਵਾਨਾਂ ਦੀ ਬੁੱਧੀ ਨਾ ਤਕਦੀ ਹੁੰਦੀ ਜਿਹੜੇ ਆਪ ਹੀ ਥੱਕੇ ਰਹਿਣ 네ਗੇਟਿਵ ਸੋਚ ਵਾਲੇ ਹੋਣ ਉਹ ਤਾਂ ਫਿਰ ਜਿਆਦਾ ਹੀ ਹੁੰਦੇ ਨੇ ਉਹ ਵੀ ਹੈ ਸਤਰਾਮਾ ਫਤਿਹ ਜਿਹਾ ਕਬੂਰ ਨਾ ਬਵੇ ਹਾਂਜੀ ਸਾਰੇ ਕਾਰਨ ਦੋ ਵੀ ਕਾਰਨ ਕਾਲ ਪ੍ਰਵੇਟ ਦੂਸਰ ਮਾਨੀ ਕੋਈ ਆ ਅਸਲ ਕੋਈ ਘਟਾ ਪਿਆ ਕੋਈ ਵਧ ਪਿਆ ਇਹ ਵਜਾ ਸੀ ਸਾਰੀ ਸ੍ਰਿਸ਼ਟੀ ਦੀ ਰਚਨਾ ਜਗਾਉਣ ਵਾਸਤੇ ਜਿਹੜਾ ਜਗ ਉਸਾ ਜਗਾ ਜੇ ਸੁਪਨਾ ਦੇਖਦਾ ਉਹ ਨੂੰ ਪਤਾ ਹੋਵੇ ਮਿਸਾਲ ਅਸੀਂ ਸੁਪਨਾ ਦੇਖਦਾ ਸਾਨੂੰ ਪਤਾ ਨਹੀਂ ਉਸ ਸੁਪਨਾ ਵੀ ਆਪਣਾ ਆਪਣਾ ਸੰਸਾਰ ਇੱਥੇ ਆਪਾਂ ਆਪਣਾ ਹੈ ਉੱਥੇ ਹੋਰ ਹੋਵੇਗਾ ਸੁਪਨਾ ਤੇ ਇਹ ਅਵਸਥਾ ਦਾ ਲਗ ਹੈ ਹਾਂ ਕੁਝ ਤੇ ਦੇਖ ਰਿਹਾ ਕੁਝ ਕਰ ਰਿਹਾ ਕੁਝ ਕਰ ਰਿਹਾ ਹੈ ਤਾਂ ਸਾਰਾ ਸੁਪਨਾ ਇਹ ਸੰਸਾਰ ਸਗ ਲੱਗਦਾ ਜਿਹੜਾ ਜਾਗਦਾ ਉਹ ਸੱਚ ਖਾਂਜ ਹੁੰਦਾ ਹੈ ਜਿਹੜਾ ਸੁਪਨਾ ਦੇਖਦਾ ਉਹ ਆਪਣੀ ਦੁਨੀਆ 'ਚ ਹੁੰਦਾ ਜੇ ਇਹ ਜੀ ਜੇ ਇਹ ਜੇ ਸੁਪਨਾ ਹੋਈ ਜਦੂਨੀ ਹੁੰਦੀ ਹੈ ਕਾਲਪਨਿਕ ਦੁਨੀਆ ਇੱਥੇ ਆ ਕੇ ਕਹਿੰਦਾ ਕਾਲਪਨਿਕ ਹੈ ਦੁਨੀਆ ਦੁਨੀਆ ਕੋਈ ਸਹੀ ਨਹੀਂ ਤੂੰ ਇਹਦਾ ਪਹਾੜ ਹੈ ਅਗਿਆਨਤਾ ਦਾ ਪਹਾੜ ਹੈ ਇਹ ਦੁਨੀਆ ਤੂੰ ਪਹਾੜ ਤਾਂ ਨਹੀਂ ਹੈ ਅਗਿਆਨ ਤੂੰ ਇਹਦਾ ਮਤਲਬ ਇੱਥੇ ਆ ਹੋ ਗਿਆ 10 ਕਰਕੇ 7 ਹੋ ਗਿਆ ਅੰਦਾਜ਼ ਹੋ ਗਿਆ ਉਹ ਸਗਿਆ ਅੰਤਾ ਜੇ ਦੀ ਦੇਰੀਏ ਚ ਗਿਆ ਅੰਤਾ ਉਹ ਨਹੀਂ ਜੀ ਰਿਹਾ ਜਾਨਸਾ ਰਜਨਾ ਛੋਟੀ ਹੋਈ ਜਾਣੀ ਹੈ ਜੋ ਜੋ ਸਾਡਾ ਗਿਆਨ ਰਹੀ ਜਾਣਾ ਅਸਲ ਜ્ઞાન ਹੈ ਬਦਲਣਾ ਰਜਨਾ ਢੀ ਹੋ ਰਹੀ ਹੈ ਦੂਹੇ ਲਾਗਾਂ ਜੇ ਜਦ ਗਿਆਨ ਵਾਤਾ ਜਦੋਂ ਊਡ ਦੂਰ ਹੁੰਦਾ ਪਹਾੜ ਤਾਂ ਆਉਂਦਾ ਲੱਗਦਾ ਪਹਾੜ ਮੇਰੇ ਨਾਲ ਨਹੀਂ ਵਹਿੰਦਾ। ਜਦੋਂ ਊਡ ਨੇੜੇ ਆ ਜਾਂਦਾ ਪਹਾੜ ਵੱਡਾ ਹੋ ਜਾਂਦਾ ਤੇ ਊਡ ਛੋਟਾ ਹੋ ਨਾ ਪਹਾੜ ਵੱਡਾ ਹੁੰਦਾ ਨਾ ਊਡ ਛੋਟਾ ਹੁੰਦਾ। ਉਹ ਦੂਰ ਹੁੰਦਾ। ਊਡ ਦਾ ਪਰ ਦੂਰ ਹੁੰਦਾ। ਉਹਦਾ ਪਰ ਦੂਰ ਹੁੰਦਾ। ਹੋਰ ਕੁਝ ਨਹੀਂ ਹੁੰਦਾ। ਇਹ ਜਿਹੜਾ ਜੋ ਜੋ ਜਿੰਦੁਰ ਜਾਗਦਾ ਆਦਮੀ ਕਬੀਰ ਕਹਿੰਦਾ ਦਾਗਤਰਪ ਵੜਨੇ ਦਾ ਹਸਪਤੈ ਸੋ ਸਾਡਾ ਜਿਹੜਾ ਸਰੀਰ ਸਾਡੀ ਜਿਹੜੀ ਦੇਹੀ ਹੈ ਗੁਪਤ ਤੇ ਇਹ ਗੁਪਤ ਹੈ ਉਹ ਤਿੰਨ ਰੱਬਾ ਵਾਂਗ ਜੇ ਫਿਰ ਦੀਸੀ ਇਸ ਤਿੰਨ ਕੋ ਬਣਾ ਡਾਡਾ ਬੁੱਝੀ ਸੀ ਅਟਾਡੇ ਵਾਂਦੇ ਆਪਾਂ ਸੋੜ ਲੋ ਵਿਧੀ ਮਰਤ ਲੋ ਵਿਧੀ ਬਾਤ ਲੋ ਕਟੇ ਕਟੇ ਲੋਕ ਮੰਨੇ ਹੋਣੇ ਲੋਕ ਘਟ ਡਟੇ ਅਸੀਂ ਤਨਾ ਲੋਕਾਂ ਚ ਕੋਲ ਦੇ ਹਾਂ ਜਬ ਤਰ ਭਵਨ ਦਲ ਮਾਇਰ ਸਮਾਵਾ ਤੇ ਤਨੇ ਭਵਨ ਤੇਰੇ ਅੰਦਰ ਸਮਾ ਜਾਣ ਫਿਰ ਫਿਰ ਸੱਚ ਖੰਡ ਤਾਪੋ ਭਾਨ ਪਰ ਰੋਸੋ ਫਿਰ ਤਨ ਯਕੀਨ ਆਜੂ ਕਿ ਹੁਣ ਮੈਂ ਸੱਚ ਕਿ ਸੂਰ ਚੜਿਆ ਆ ਹੁਣ ਸੂਰ ਜੇ ਚਲੇਗਾ ਭਰੋਸਾ ਹੋ ਜੂ ਤਾ ਭਾਨ ਪਰ ਆਵਾ ਸੇਸਰ ਨੂੰ ਕੋਲ ਉਸ ਆਤਲਾਂ ਜਿਹੜੇ ਸੂਰ ਚੜਿਆ ਆ। ਕਿਵੇਂ ਪਤਾ ਲ ਗੂਰ ਕਿਹੜੇ? ਸੂਰ ਜਿੱਤੇ ਦੀ ਚੀਂਤ ਸ਼ਾਦੀ ਹੈ। ਸਾਡੇ ਕੋਲ ਜਿੱਦਾਂ ਸੂਰ ਚੜਿਆ ਉਹਨਾਂ ਦੀ ਸ਼ਾਦੀ ਦਸੀ ਵਿਆਹ ਹੁੰਦੀ ਹੈ। ਸ਼ਾਦੀ ਕਹੋਦੇ ਦਸੀਗੇ। ਜਿਹੜਾ ਦਵਾਈ ਦੱਸਦਾ ਦਵਾਈ ਬਣਾਉਂਦਾ ਬਿਮਾਰੀ ਦੀ ਉਹ ਨਾਲ ਦਸੀ ਵੀ ਜਾਂਦਾ ਵੀ ਜੇ ਰਲਣਾ ਫਿਰ ਐ ਲੱਛਣ ਹੋਣ ਦੇ ਚਲੇਗਾ ਨੇ। ਤੁਹਾਡੀ ਦਾ ਅਲਜ ਹੁੰਦਾ ਉਹਦੇ ਜਿਹੜੇ ਲੱਛਣ ਤੋਂ ਜੇ ਉਹਦੇ ਨਾਲ ਹੱਡ ਵੀਤੀ ਹੈ ਉਹ ਤਾਂ ਆਪਣੇ ਹੱਡ ਵੀਤੀ ਦੱਸ ਲੈ ਤੇ ਨਹੀਂ ਕੋ ਸਵਾਲ ਇਹ ਸਮਝਾ ਤੇ ਨੇ ਪਵਣ ਪੱਪਾ ਕਰ ਜਦ ਬਾਤ ਨਹੀਂ ਕਿ ਮਨਪੁਰਗਾ ਜੈਸਾ ਉਪਰ ਆਕਾਸ ਤੇ ਕਿਤਨੇ ਪਵਣ ਤਾਂ ਛੋਟੇ ਸਾਰੇ ਆਕਾਸ਼ ਵਿੱਚ ਧਰਤੀ ਨਹੀਂ ਹੈ ਫਿਰ ਸਾਰੇ ਆਕਾਸ਼ ਵਿੱਚ ਜੀਵਨ ਨਹੀਂ ਹੈ ਅਕੀਰਾ ਦਾ ਜੀਵ ਅਕੀਰਾ ਖਾਲੀ ਹੈ ਉਹ ਤੈਨੂੰ ਬਣਦਾ ਇੱਥੇ ਹੀ ਨਾ ਤੈਨੂੰ ਬਣਦਾ ਉਹ ਥਿੰਗ ਆ ਜਿੱਤੇ ਜੀਵਨ ਹੈ ਜੀਵਨੀ ਉੱਤੇ ਪ੍ਰਗਤੀ ਹੈ ਦਰਵਾ ਬਣਾ ਦੇ ਵਿੱਚ ਇਸ ਮਾ ਜਨ ਸਾਧਨ ਜਗਤਿਰ ਭਗਵਾਨ ਦਾ ਮਾਹਿਸਮਾ हां تن ਭਵਨ ਥਲੇ ਰਹਿ ਗਿਆ ਮਤਲਬ ਜਿਹੜਾ ਹਿਰਦਾ ਵਿਸ਼ਾਲ ਹੋ ਗਿਆ ਤੇ ਚੱਲ ਗਿਆ ਭਵ ਸਾਦਰ ਸੁਖ ਸਾਦਰ ਬਣ ਸਮਾਗਤ ਜੇ ਸੁਖ ਸਾਦਰ ਹੋ ਗਿਆ ਜਿਹਨੇ ਭਵਨ ਸਮਾਇ ਹੋਏ ਨੂੰ ਦੁਬੀ ਨਹੀਂ ਸਾਦੀ ਗਏ ਉਹ ਪਤਾ ਕੁਝ ਨਹੀਂ ਲੱਗਣਾ ਕੋਈ ਸਾਡੇ ਕੋਲ ਫਾਰਮੂਲਾ ਕੋਈ ਨਹੀਂ ਔਰ ਉਹ ਜਿਹੜਾ ਉਹ ਛੋਟਾ ਨਹੀਂ ਹੋਇਆ ਉਹ ਨਾਲ ਦਾ ਕਾੜੇ ਵੱਡਾ ਹੋ ਗਿਆ ਟੈਸਟ ਹੈ ਜਦੋਂ ਟੈਸਟ ਡਾਕਟਰ ਕਰਦੇ ਨੇ ਸਾਡੇ ਖੂਤ ਚ ਕੋਈ ਹੁਣ ਇਹਦਾ ਟੈਸਟ ਨੇ ਇਹਦੇ ਵਿੱਚ ਵੀ ਕੀ ਨਾ ਟੈਸਟ ਹੈ ਦਾ ਤ੍ਰਿਪਵਨ ਤਾਲ ਸਮਾਵਾ ਤਾ ਤੋਂ ਪਾਹ ਬਰੂਸ ਫਿਰ ਸੂਰਜ ਉਦੋਂ ਸੂਰਜ ਤੇ ਆ ਸੂਰਜਾ ਉਹਦੇ ਪਾਸ ਜਦ ਚੀਨਾ ਤਾਂ ਇੱਕ ਬ੍ਰਹਮਤ ਪਿਆ ਪ੍ਰਗਾਸਾ ਉਹਦੇ ਪਾਸ ਜਦ ਚੀਨਾ ਕਿਹੜਾ ਪ੍ਰਗਾਸਾ ਜਿਹੜਾ ਬ੍ਰਹਮ ਗਿਆਨੀ ਦੇ ਬਰੂਤਾ ਹੁੰਦਾ ਹੁੰਦਾ ਬ੍ਰਹਮ ਗਿਆਨੀ ਕੇ ਮਨ ਪਰਗਾਸ ਪਰੋ ਉਹ ਜਦੋਂ ਹੋ ਜੂਗਾ ਪ੍ਰਗਾਸ ਫਿਰ ਭਵਸਾ ਕਰ ਅ ਸੁਖ ਦੀ ਸਭ ਆ ਗਈ ਨਾ ਕਿਵੇਂ ਹੈ ਤਾਂ ਜਦੋਂ ਸੁਣਦਾ ਬੈਠਾ ਇਹਦਾ ਦਰਸ਼ਨ ਹੋ ਗਿਆ ਸਮਝ ਆ ਗਈ ਖਾਨੇ ਚ ਬੈਠੀ ਗੱਲ ਉਹੀ ਹੈ ਇਸ ਵਿੱਚ ਜਿਨਾ ਜਰ ਦੇਖਿਆ ਨਹੀਂ ਅਦ੍ਰੋ ਮਤ ਨਹੀਂ ਲਿਆ ਸਮਝ ਨਹੀਂ ਪੂਰੀ ਆਈ ਮਨ ਮੰਨਣੇ ਗਿਆ ਉਹਨਾਂ ਜਰ ਅਜੋ ਸੁਣੇ ਤੇ ਨਹੀਂ ਬਿਸ਼ਵਾਸ ਦੇਖ ਕੇ ਤੇ ਵਿਸ਼ਵਾਸ ਹੁੰਦਾ ਕਈ ਵਾਰ ਸੁਣਦੇ ਵਿੱਚ ਅਰ ਸਤਨਕ ਫਰਕ ਰਹਿੰਦਾ ਨਾਲ 졸ਣੀ ਪੂਰੀ ਸਮਝੀ ਕੋਣਾ ਸੁਭਿਵਾਸ ਉਹ ਜਿਹਨੂੰ ਸਮਝਣ। ਨ ਕੋਈ। ਕਿਸ ਨਾਲਿਕ ਕਿਸ ਬਲਿਹਾਰ ਨੇ ਜਲਥਲ ਭਈਲ ਸੋਏ। ਨਾਲਿਕ ਕਿਸ ਬਲਿਹਾਰ ਨੇ। ਜਲਥਲ ਭਈਲ ਸੋਏ। ਔਰ ਜਲਥਲ ਔਰ ਭਈਲ ਦੇ ਵਿੱਚ। ਕੋਣਾ ਪਰਮੇਸ਼ਰ ਨੂੰ ਕਹਿੰਦਾ ਉਹ ਅਖੀਰ ਤਨੂ ਲਾ ਕੇ ਖੜਾ ਖੜਦਾ ਵਿਅਰਥ ਹੈ ਉਹ ਹੁੰਦੇ ਜੁੜੀ ਹੁੰਦਾ ਕਿ ਜਾਈਏ ਤਾਂ ਇਹ ਕਹਨ ਅਬ ਤੁਸੀਂ ਅੱਗੇ ਚਲੋ ਤੋ ਟੱਕ ਦੋ ਪੰਕਤੀਆਂ ਹੋਰ ਫੜੋ ਕਿ ਪਿੱਛੇ ਤੋਂ ਦੋ ਪੰਕਤੀਆਂ ਪੜਾ ਕੇ ਲਿਆਓ ਤੁਹਾਨੂੰ ਆਪੇ ਪਤਾ ਲੱਗੂਗਾ ਲਿਖੀ ਆ ਵਾਸਤੇ ਨਹੀਂ ਬਾਣੀ ਲਿਖੀ ਹੋਈ ਪਰ ਬਾਣੀ ਲਿਖਣੀ ਆਉਂਦੀ ਔਖੀ ਹੈ ਇਹ ਗੱਲੇ ਨਹੀਂ ਔਖੇ ਸਮਝੋ ਕਿ ਜਦੋਂ ਪ੍ਰਭ ਉੱਥੇ ਵੀ ਵਰਤਣਾ ਉੱਥੇ ਵੀ ਪ੍ਰਭ ਵਰਤਣਾ ਆਖਰ ਦੱਸ ਦਿੱਤਾ ਤੁਹਾਨੂੰ ਵੀ ਪ੍ਰਭ ਦੇ ਇੱਥੇ ਅਸ ਕੀ ਵੰਦ ਕਾਰਨ ਕਾਹਨ ਕਾਰਨ ਕਾਹਨ ਉਹ ਹੈ ਜਿਹੜੇ ਧਰਤੀ ਜੀਵ ਨੇ ਜੀਵ ਲਫ਼ਜ਼ ਇੱਕ ਹੈ ਕਾਰਨ ਕਾਹਨ ਕੌਣ ਹੈ ਜੀਵ ਕਾਰਨ ਕਾਹਨ ਚਲ ਕਿਹੜਾ ਜੀਵ ਸਾਰੀ ਹਰ ਕੋਈ ਕਾਰਨ ਹਰ ਕੋਈ ਗੜ ਕਰਨਾ ਹਰ ਜੀਵ ਗੜ ਕਰਨਾ ਹਰ ਜੀਵ ਗੜ ਕਰਨਾ ਜੇ ਕਿਹਦਾ ਵੀ ਆਈ ਇੱਕ ਮੈਨੂੰ ਲੱਗਿਆ ਇੱਕ ਪਾਹੀ ਲੱਗਿਆ ਇੱਕ ਲੱਗਿਆ ਹਰ ਬਹੁਤੇ ਵਕਤ ਉਹ ਵੀ ਕੋਲ ਹਨ ਇਹਨਾਂ ਫਿਰ ਇਹ ਤਾਂ ਕਿਤੇ ਵੀ ਇਹਨਾਂ ਇੱਕ ਫਿਰ ਇਹ ਕਹ ਕਿ ਐਸੇ ਦ੍ਰਿਸ਼ਟੀ ਤੋਂ ਨਾਲ ਦੇਖਣਾ ਹੈ ਦ੍ਰਿਸ਼ਟੀ ਤੋਂ ਐਸੇ ਮੈਨੂੰ ਨਾਲ ਦੇਖਾਂਗੇ ਫਿਰ ਅਨੇਕਤਾ ਕਿ ਇਤਨਾ ਦਿਖੂਗਾ ਇਸੇ ਮੇਰੇ ਦਾਮ ਉਸੇ ਮੇਰੇ ਕੋਈ ਪਈ ਸੁਤੇ ਹੀ ਪਈ ਕੋਈ ਕਿੰਨੀ ਘੋੜੀ ਨਹੀਂ ਬੰਦ ਹੋਣਾ ਵਰਕੀ ਹੋਣਾ ਬੰਦ ਹੋਣਾ ਸੁਣਨ ਨੂੰ ਸੁਣਨ ਹੋਣਾ ਸੁਣਨ ਨੂੰ ਹੋਣਾ ਉਦੈ ਸੁਣਨ ਨੂੰ ਸੁਣਨਾ ਹੋਣਾ ਇੱਥੇ ਜਾਗ ਜਾਣਾ ਆ ਸੱਭਾ ਉਦੈ ਸੁਣਨ ਨੂੰ ਸੁਣ ਹੋਣਾ ਇੱਥੇ ਜਾਗ ਜਾਣਾ ਉਦੈ ਸੁਪਨਾ ਦੇ ਬਾਅਦ ਗੂੜੀ ਨੀਂਦ ਸਮਝਾਣੇ ਸੁਪਨਾ ਦਾ ਗੂੜੀ ਨੀਂਦ ਸਮਝਾਣੇ ਸੁਪਨਾ ਵੰਡੌਣਾ ਸੌਂ ਜਾਣਾ ਸਮਾ ਗੂੜੀ ਨੀਂਦ ਇੱਥੇ ਜਾਗ ਜਾਵੇ ਅੱਲਾਹ ਜੀ ਵੀ ਜੇ ਜਾਂਦੇ ਵੀ ਸੁਬਹਾ ਵੰਦੋਂ ਹੁੰਦਾ ਗੂੜੀ ਦੀ ਸੌਂ ਜੀ ਵੀ ਸੁਪਨਾ ਵੰਦ ਹੁੰਦਾ ਤਾਂ ਵਾਰ ਸੁਪਨਾ ਵੰਡੋ ਜੇ ਨੀਂਦ ਪੂਰੀ ਗੂੜੀ ਆ ਜਾਵੇ ਠੀਕ ਸੁਣ ਨਾ ਲੋਕਾਂ ਦਾ ਸੁਣਨਾ ਹੈ ਤੁਮ ਸੁਣ ਸੁਣ ਸੁਣ ਸੁਣ ਸੁਣ ਹੋ ਗਿਆ ਤੇ ਭਵਨ ਸੁਣ ਸੁਣ ਕਿਉਂਕਿ ਉਹ ਸੋਤਾ ਨਹੀਂ ਰਹਗਾ ਸਤਗੁਰ ਜਾਗ ਜਾਦੇ ਹੋ ਉਹ ਮੋਤ ਕੋ ਜਲ ਐਸੀ ਤੀਰ ਸੋਤਾ ਕਰਕੇ ਜੇ ਨੁੜਦਾ ਦਿਓ ਤਾਂ ਕੀ ਹੁੰਦਾ ਤਾਂ ਰਾਤ ਨੂੰ ਪੱਖਾ ਚਲਾਇਆ ਹੁੰਦਾ ਨਾ